ਨੋਜੋ ਉਸਤ ਕਰੇ ਦੇਖ ਜਨ ਅੰਤ ਨਾ ਪਾਰਾ ਵਾਰ ਨਾਨਕ ਰਾਜਨਾ ਪ੍ਰਭ ਰਜੀ ਬੋਗਦੀ ਅਨੇਕ ਪਰਬਾ ਉਸਤ ਕਹਨ ਅਨੇਕ ਜਨ ਐਸੇ ਇਲੇ ਜਾਣਦੇ ਜਨ ਵਾਲੇ ਨੇ ਤਨ ਸਭ ਤੇ ਨਜਲੇ ਗਾਉਂ ਅਨੇਕ ਬਹੁਤ ਆਪਣੇ ਉਸਤ ਦੀ ਅਜ਼ਦਨ ਕਰੀ ਉਸਤ ਕਹਨ ਅਨੇਕ ਪਰ ਜਾਣ ਕਰਦੇ ਨੋ ਜਨ ਜਿਦੇ ਜਾਨਵਾਨ ਅਜ ਵੀ ਉਹ ਗੱਦੇ ਉਹ ਕਿੰਨੇ ਕਰਦੇ ਆਂ ਤਨ ਪਰਵਾਹ ਬਹੁਤ ਬਹੁਤ ਉਹਦੇ ਨਹੀਂ ਕਰੀਦਾ ਸੋ ਹਾ ਨਾਮਿਕ ਰਚਨਾ ਪ੍ਰਭ ਜੀ ਬੋਬੀ ਦੀ ਅਨੁਕਮਰਤਾ ਆਹਨੇ ਪ੍ਰਭ ਮਾਲ ਜੀ ਪ੍ਰਭੰਤਲਾ ਵੀ ਪ੍ਰਭਾ ਉਹ ਕੋਲ ਵੀ ਪ੍ਰਭਾ ਇਹ ਤੇ ਜ਼ਰੂਰਤ ਹੀ ਹੈ ਗੋਣ ਕੋਈ ਬਰਬਾਹ ਹੈ ਬਰਬਾਹ ਉਹ ਪ੍ਰਭੂ ਆਇਆ ਹੈ ਪ੍ਰਭਾ ਹੈ ਕੋਈ ਗੱਲ ਆ ਰਾਸ਼ਟਰਪਤੀ ਆ ਗਵਰਨਰ ਦਾ ਬੋਲਦਾ ਫਰਕ ਤਾਂ ਹੁੰਦਾ ਹੀ ਕੋਈ ਗੱਲ ਦਾ ਫਰਕ ਨਹੀਂ ਹੁੰਦਾ ਹੋਜੀ